कई कोट राजस तामस सातक कई कोट वेद प्राण स्मृति और शास्त्र कई कोट राजस तामस सातक हुँ। सातक हुँ। कई करोड़ आदमी रहे रजगुण के बिच में रजस ने अंग्रेज टमपोर के बिच में तामस ने, ने सारी चेतन की गल थी चित्त की ਇਹੀ ਰਕਨਾ ਦੇ ਵਿੱਚ ਹਾਂ ਜੇਦਤੀ ਗੱਲ ਆ ਸਾਰੀ ਕੋਪੰਪਨੀ ਆਹਦੋਏ ਪਾਉਣ ਪਾਣੀ ਆਲੀ ਜਾਂਦੀ ਸੀ ਉਹੀ ਵਿਖਰਦੀ ਸੀ ਜਾ ਕੇ ਇਹ ਕਿਵੇਂ ਵਿਖਰਦੀ ਇਹ ਕਲੀ ਕੋਪੰਪਨੀ ਦੇਸ਼ ਨੂੰ ਬੰਨਦਾ ਜੇ ਇੱਥੇ ਆ ਕੇ ਆ ਜਾਂਦੀ ਸੀ ਇਹ ਗੱਲ ਯਾਰ ਜੀ ਹਾਂਜੀ ਕਈ ਕੋਟ ਰਾਜਸਥਾਨੋਂ ਸੱਤਕ ਕਈ ਕੋਡ ਬੇਦ ਪ੍ਰਾਨ ਸਿਵਰਤੀ ਸਾਸਤਰ ਕਈ ਕੋਡ ਬੇਦ ਪ੍ਰਾਨ ਸਿਵਰਤੀ ਅਰ ਸਾਸਤਰ ਬੇਦ ਪ੍ਰਾਨ ਸਿਵਰਤੀ ਉਹ ਨੇ ਜਿਹੜੇ ਸ਼ਾਸਤਰ ਦੇ ਨੇ ਉਹ ਨੇ ਆਪੇ ਉਹ ਕਹਿੰਦੇ ਹੁੰਦਾ ਤੁਰਦਾ ਜਲਦੀ ਫਿਰ ਯੂਨੀਵਰਸਿਟੀ ਹੈ ਯੂਨੀਵਰਸਿਟੀ ਥੋੜੀ ਹੈ ਕੋਈ ਯੂਨੀਵਰਸਿਟੀ ਅਲੇ ਗਿਆ ਕੋਲ ਸਭ ਦੀ ਯੂਨੀਵਰਸਿਟੀ ਹੈ ਉਹ ਬੇਦ ਉਹ ਆ ਜਿਹੜੇ ਵੇਦ ਚਾਰੇ ਵੇਦ ਜਵਨੀ ਆਦਿ ਨੇ ਰੋਕ ਕੇ ਕੱਢ ਕੀਤੇ ਤੇ ਵੇਦਿਆ ਫਿਰ ਉਹ ਉਹ ਵੇਦ ਲਿਆਵਾਂਗੇ ਆਪਾਂ ਪੜ੍ਹਾਂਗੇ ਉਹਨੂੰ ਕੁਝ ਬੱਝ ਨੂੰ ਦਦਾ ਦੀ ਗੱਲ ਪੁੱਛਣੀ ਆ ਪ੍ਰਾਨ ਜਿਹੜਾ ਪ੍ਰਾਨ ਦੀ ਦਸਵਾਫੇ ਪ੍ਰਾਨ ਕੰਸ਼ਰਸ ਆ ਰੌਤ ਗਿਆਨ ਹੈ ਪੁੱਛਣਾ ਪੁੱਛ ਲਓ ਤੇ ਫੋਲਦਾ ਫਿਰ ਨਾ ਪ੍ਰਾਨ ਹੈ ਉਹਨਾਂ ਕਰ ਉਹ ਸੁਣਾ ਦੇਣੀ ਆ ਤਦ ਜਿਹੜੀ ਇੱਥੇ ਬੈਠਾ ਦਿਨਾ ਦੂਗਾ ਉਹ ਪ੍ਰਾਣ ਵਧੀਆ ਕਿ ਵਰਕੇ ਬੋਲੇਗਾ ਕਿ ਵਰਕੇ ਫਟੇ ਹੋਏ ਉਹਦੇ ਵਿੱਚੋਂ ਫਿਰ ਉਹਦਾ ਵਾਕਾ ਫੜ ਲੈਣੀ ਹੱਦੇ ਲਿਖਿਆ ਉਹਦਾ ਜਿਹਦੇ ਸ਼ੁੱਧਾ ਚੀਜ਼ਾਂ ਦੇ ਕਿਹਾ ਨੇ ਇਹੇ ਸ਼ਾਸਤਰ ਦਾ ਗਿਆਤਾ ਸ਼ਾਸਤ੍ਰ ਹੈ ਸ਼ਾਸਤ੍ਰ ਕਹਿੰਦੇ ਆ ਕਹਿੰਦੇ ਆ ਹੈ ਹਾਂ ਸਈ ਕੋਟ ਕੀ ਇਹ ਰਤਮ ਸਮੁੰਦ ਕਈ ਕੋਟ ਨੰਨਾ ਪ੍ਰਕਾਰ ਜਲਦਾ ਕਈ ਕੋਟ ਕੀ ਇਹ ਰਤਮ ਸਮੁੰਦ ਸਈ ਕੋਟ ਨੰਨਾ ਪ੍ਰਕਾਰ ਜਲਦਾ ਦੇ ਸਮੁੰਦਰ ਨਾਲ ਉਹ ਕਈ ਆਗਦੀ ਹੈ ਸਮੁੰਦਰ ਹਾਂ ਸਮੁੰਦਰ ਤੋਂ ਆਈ ਹੋਇਆ ਹੈ ਉਹਨਾਂ ਦੇ ਸਮੁੰਦਰ ਨਾਲ ਉਹ ਸਾਗਰ ਵੀ ਹੈ ਸਮੁੰਦਰ ਹਾਂ ਸਾਗਰ ਜਿਹੜਾ ਉਹਦਾ ਸਾਗਰ ਦੀ ਬਾਉਂਡਰੀ ਨਹੀਂ ਬਹੁਤ ਦੀ ਬੌਂਡਰੀ ਉਹ ਨੂੰ ਕਿ ਮਾਇਆ ਜੋਂ ਦਾ ਸਾਗਰ ਮਾਰੇ ਦੇ ਬਾਹਰ ਸੁਖ ਸਾਗਰ ਸੁਖ ਸਾਗਰ ਉਹ ਕਿ ਸਾਗਰ ਦੇ ਵਿਚ ਇਹਨਾਂ ਦਾ ਦਰਸਾ ਸਾਗਰ ਦੇ ਵਿਚ ਹੈ ਕਿਉਂਕਿ ਇਹਦੇ ਵਿਚ ਸਬੂਤ ਹੈਗੇ ਨੇ ਅਜਿਹੇ ਦੂਰ ਦੇ ਨਾ ਛੋਟੇ ਸਮੁੰਦਰ ਇਹਦੇ ਵਿਚ ਦੇ ਕਾਹਨੋਂ ਐਸਾ ਕਰ ਕਹਦੇ ਆ ਜੇ ਛੋਟੇ ਗਿਆਨ ਤੇ ਸਮੁੱਗ ਕਰਦੇ ਉਹ ਵੀ ਇਹਦੇ ਵਿੱਚੇ ਇਹਦੇ ਬਿੱਜ ਆ ਆਹ ਰਤਾ ਹਮੋਂ ਤੋਂ ਲੈ ਬਿੱਜਦੇ ਰਾਈ ਕਈ ਕੋਟ ਨਾਨਾ ਪ੍ਰਕਾਰ ਜਾਂਦੇ ਕਈ ਕੋਟ ਨਾਨਾ ਪ੍ਰਕਾਰ ਜਾਂਦੇ ਨਾਨਾ ਪ੍ਰਕਾਰ ਦੇ ਜਾਂਤਰ ਹੈਗੇ ਕੀ ਕਈ ਕੋਟ ਕੀ ਇਹ ਲੱਖ ਵੀ ਹੁੰਦੀਆਂ ਕਈ ਕੋਟ ਨੇ ਇੱਥੇ ਤਾਂ ਧੀ ਵੀ ਐਸੇ ਧੀ ਗੱਲ ਦੀ ਟੋਟਲ ਰੋ ਉਹਦੇ ਵਿੱਚ ਰਚਨਾ ਚਾਹੀਦੀ ਹੈ ਨਾਨਕ ਰਚਨਾ ਬਹੁ ਵਿਧੀ ਅਨੁਕ੍ਰਮ ਪ੍ਰਕਾਰ ਦੀਆਂ ਚਾਰ ਖਾਨੀਆਂ ਦੀ ਗੱਲ ਨਹੀਂ ਹੈ ਇੱਥੇ ਪੂਰੀ ਰਚਨਾ ਦੀ ਗੱਲ ਹੈ ਇੱਥੇ ਨਾ ਕਿ ਇਹ ਧਰਤੀ ਦੀ ਗੱਲ ਹੈ ਜੀ ਜੀ ਵੀ ਨਹੀਂ ਹੋਈ ਹੈ ਹਾਂ ਜੀ ਇਹ ਕੋਈ ਵੀ ਨਹੀਂ ਹੋਈ ਪਸੇ ਸਾਰੀ ਵੀ ਗੱਲ ਚੱਲਦੀ ਆ ਮੈਂ ਤਾਂ ਲੱਭਦੇ ਵੇਟਣ ਵੀ ਜੇ ਕਿਤੇ ਜੀਵਨ ਹੈ ਹੈ ਜਾ ਉਹ ਐ ਹੈ ਜੇ ਲੱਭਦੇ ਨੇ ਨਾ ਐ ਜੇ ਤਾਂ ਲੱਭਦੇ ਨੇ ਇਹ ਕਈ ਕੋਡ T H ਕਈ ਕੋਡ ਐਸਾ ਵੀ ਨਾ ਜਾਨੀ ਲੰਬੀ ਆਈ ਹੈ ਇਹ ਲੰਬੀ ਉਮਰ ਹੈ ਹੋਰ ਵੀ ਖਬਰਾਂ ਕਿਤੇ ਕੋਈ ਵੀ ਹੋਣੇ ਨੇ ਜੀਵਨਾ ਲੱਬੇ ਵਾਲੇ ਵੀ ਹੋਣਾ ਕਿਤੇ ਕੁਝ کئی ਕੋਟ ਮੇਰ ਸਵਰਨ ਥੀਵੇ کئی ਕੋਟ ਗਿਰੀ ਬੇਦ ਸੋਲ ਤਿੰਨ ਜਿਹੜੇ ਅੱਜ ਬਤਾਲਨੇ ਦੀ ਦਾਂ ਨਾਮ ਦੇ ਨਾਲ ਵਿਰੋਧ ਕਰਨ ਵਾਲੇ ਟੀਟੀ ਮਤਲਬ ਤਾਕਤ ਲਾ ਕੇ ਖੜੇ ਨੇ ਜਿਹਨੇ ਡੱਕਣ ਵਾਲੇ ਫਤ ਦੇ ਪ੍ਰਚਾਰ ਨੂੰ ਉਹ ਗਿਰਦੇ ਮੇਰ ਵੀ ਨੇ ਇਹ ਕਈ ਕਰੋੜ ਗਿਰਮੇ ਨਿਹੜੀ ਸੀਕੇ ਗਿਰਮੇ ਪਹਿਲਾ ਸੌਣ ਹੋ ਗਏ ਬਣ ਢੇਰੀ ਹੋ ਗਏ ਜਿਹੜੇ ਬੜੇ ਬੜੇ ਪਹਾੜ ਬਣੇ ਸੀ ਨਾ ਆਪਣਿਆਂ ਵਾਲੇ ਵੀ ਰੋਕਾਂ ਲਏ ਚਾਹ ਢੇਰੀ ਹੋ ਕੇ ਗੁਰਮਤਿ ਨੂੰ ਮਤ ਕੇ ਨਕਰੜ ਕੋ ਤੇ ਬੈ ਗਿਰਦੇ ਆ ਚੱਡੀ ਦੇ ਵਿੱਚੋਂ ਬੜੇ ਬੜੇ ਉਹ ਆਏ ਨੇ ਸਤਾ ਦੇ ਤੋਂ ਚੌਕੀ ਤੇ ਚਲਾਏ ਗਏ ਅਸ ਚਲਾ ਕੇ ਰੰਗਾਲੀ ਕੋ ਤਾਂ ਉਹ ਤੇ ਕੀ ਕੀਤਾ ਜਾਣੇ ਕਹ ਰਹੀ ਕਿ ਨਾਰ ਕੋਸਾ ਰਹਿਣਾ ਤੇ ਉੱਥੇ ਇਹ ਕੁਝ ਕਰੋੜ ਨੇ ਅਗੋਂ ਵਜਾਉਣ ਆਵੇ ਨੇ ਕੌਣ ਵਜਾਉਣ ਵਾਲੇ ਕਈ ਕੋਟ ਜੱਟ ਕਿੰਨਰ 50 ਕਈ ਕੋਟ ਨੇ ਉਹ ਜਿਹੜੇ ਰੱਤ ਪੀਣੇ ਵਾਲੇ ਨੇ 50 ਉਹ ਜਿਹੜੇ ਉਹ ਕਰਦੇ ਦੀ ਜੰਤਰ ਮੰਤਰ ਹੂਲ ਪੀਂਦੇ ਨੇ ਦੇਵੀ ਭਲਾਈ ਕਾਲੀ ਉਹ ਜਿਹੜੇ ਉਹਦੇ ਬਲੀਆਂ ਦਿੰਦੇ ਨੇ ਦੇਵਿਆਂ ਦੀਆਂ ਨੇ 50 ਪ੍ਰੇਤ ਘੋਰੀ ਅਘੋਰੀ ਦੀ ਹੋਰ ਉਹ ਵੀ ਬਦਲ ਜਸਾਜ ਕਈ ਘੜ ਤੋਂ ਉਹਦੇ ਪ੍ਰੇਤ ਸ਼ੁਕਰ ਮੇਰੇ ਬਖਸ਼ਾ ਚ ਹਾਂ ਉਹਦੇ ਪ੍ਰੇਤ ਜਿਹੜੀ ਬਹੁਤ ਬਦਲ ਜਨਾਂ ਰਚਨਾ ਦੇ ਵਿੱਚ ਤਾਂ ਸਾਰੀਆਂ ਜੋੜੀਆਂ ਸਾਰੀਆਂ ਜੋੜੀਆਂ ਇਹ ਜਦ ਆਦਮੀਆਂ ਦੇ ਸਵਾਰ ਚੜ ਰਹੇ ਨੇ ਜਦੋਂ ਜੀ ਉਹ ਤਾਂ ਹੈ ਇੱਕ ਜਿਹੜੇ ਧਰਮ ਦੇ ਵਿੱਚ ਦੋਏ ਪੱਖ ਨੇ ਧਰਮ ਦੇ ਜਿਹੜੀਆਂ ਪੌੜੀਆਂ ਲੋਕ ਚੜ ਕੇ ਉਹਨਾਂ ਨੇ ਜਿੱਤ ਦੁਆਰੇ ਉੱਪਰ ਐ ਉਹ ਜਾਂਦੇ ਜਾਂਦੇ ਕਿਸਾਦ ਭੂਤ ਵੀ ਬਣ ਜਾਂਦੇ ਨੇ ਕਿੱਥੇ ਇਹ ਰਾਹ ਵੀ ਦੂਏ ਪਾਸ ਸਾਹ ਤਾਂ ਰਾਹ ਐ ਨੂੰ ਦੇਖਦੇ ਵਾਲਾ ਪਾਸਾ ਵੀ ਦਿਖਾਈ ਜਾਂਦਾ ਹੈ ਉਹ ਵੀ ਦਿਖਾਈ ਜਾਂਦਾ ਹੈ ਅਗਰ ਇੱਥੇ ਕਿਉਂ ਹੈ ਰਤਨ ਉਹ ਨਾ ਜਰਿਆ ਜਨਾਜਲ ਪਾਸਪੋਰਟ ਦੀ ਪਾਪ ਵਾਲੀ ਤਸਵੀਰ ਆਪੇ ਹਾਂ ਪਾਪ ਵਾਲੀ ਉਹ ਮਿਲ ਕੇ ਸਿਰਚ ਪਾਈ ਐ ਦੋਹਾਂ ਦੀ ਹਾਂ ਪਾਪ ਵਾਲੀ ਟੀਮ ਦੇ ਵੀ ਹੈਗੇ ਨੇ ਜੋਦੇ ਵਾਲੀ ਟੀਮ ਦੇ ਵੀ ਖੜਾ ਰੀ ਦੇ ਧਰ ਤੇ ਖਾਇ ਤੋਂ ਜਿਹੜੇ ਆਏ ਨੇ ਪਹਿਲਾਂ ਪਹਾੜ ਜਿਹੜੇ ਜੋਗੀ ਨੇ ਗਿਰਮੇ ਗਿਰਮੇ ਖਤਰ ਇਹ ਇਦਾਂ ਦੇ ਹੈ ਤਾਂ ਪੋਜ਼ਿਟਿਵ ਹੈ ਪਰ ਇਹਨਾਂ ਜਿਹੜੇ ਨੈਗੇਟਿਵ ਸੁਭਾਅ ਵਾਲੇ ਸੱਚ ਦੇ ਵਿਰੋਧੀ ਹੁੰਦੇ ਨੇ ਆਪਣੇ ਆਪ ਨੂੰ ਸੱਚ ਸੱਚ ਦੀ ਜਿੱਤ ਬੰਦੇ ਨੇ ਸਾਡੀ ਜਿੱਤ ਉਹ ਪਰ ਸੱਚ ਦੇ ਸੱਚ ਦੇ ਭੈਠੀ ਨਹੀਂ ਰੋ ਪੈਣੇ ਰਾਜ ਸੱਚ ਤੇ ਤਾਉਗਾ ਆ ਗਿਆ ਤੈਨੂੰ ਕਰਵਾ ਰਿਹਾ ਬਹੁਤ ਸਾਰਾ ਸਤ ਸਰਾ ਜੀਰੇ ਸਾਮਾਸ ਨੇ ਤਾਂਸੀਰ ਦੇ ਉਹ ਜਿਆਦਾ ਸ਼ਿਫ ਦੇ ਚੇਲੇ ਨੇ ਸਿਫਕ ਪਰ ਜੋ ਨਕਲ ਦੇ ਨੇ ਤਾਂਸੀਰ ਇਹ ਨਾ ਕਰਦੇ ਤਮੋਂ ਕੋਣਾ ਨਹੀਂ ਸ਼ਿਫ ਜੀ ਬਾਦਾ ਉਹਦਾ ਵਰਨਾ ਬਤਰਾ ਪ੍ਰੂਲ ਸੁਭਾਅ ਦਾ ਫਰੋ ਜਿਆਦਾ ਹੈ ਕਰਦਾ ਹੈ ਸਰੀਰਿਤ ਪਾਉਂਦਾ ਇਸ ਕਰਕੇ ਤਾਂਸੀਰ ਹੈ ਸੁਭਾਅ ਰਜੋਗੁਣ ਦੇ ਵਿੱਚ ਰਾਜਸੀ ਸੁਭਾਅ ਹੈ ਰਜੋਗੁਣ ਰਾਜਸੀ ਸਤੋਗਣ ਦੇ ਵਿੱਚ ਉਹ ਚਲਾ ਜਾਂਦਾ ਵੀ ਜਿਹੜੇ ਅਕੀਰ ਸੰਤੂਰ ਸੰਦੇ ਬੈਠੇ ਲੋਕ ਜਿਹੜੇ ਰਿਸ਼ੀ ਕਪ੍ਰੀਸੀ ਸਾਧੂ ਸੰਤ ਹੋਏ ਉਹ ਸਤੋਗਣ ਭੂਤ ਪ੍ਰੇਤ ਸੁਪਰ ਮਿਰਗਾ ਚ ਕਈ ਵਾਰ ਕੋਡ ਭੂਤ ਪ੍ਰੇਤ ਉਤਪ੍ਰੇਤ ਨੇ ਜਿਹੜੇ ਜਿਉਦਾ ਹੀ ਨੇ ਆਇਆ ਉਹ ਫਸੇ ਨੇ ਉਤਪ੍ਰੇਤ ਨੇ दे दे दे। ने, ने वैसे? सुकर, ਦੇ ਦੇ ਸ਼ੂਕਰ ਕੰਨ ਨਸੂਲ ਨੂੰ ਵੈਸੇ ਸਾਕਰ ਤੇ ਸ਼ੂਕਰ ਭਲਾ ਰੱਖੇ ਆਛਾ ਗਾਉ ਉਹ ਕਹਿੰਦੇ ਸਾਕਰ ਦਾ ਸ਼ੂਕਰ ਨੂੰ ਵੀ ਭੜੇ ਜਿਹੜੇ ਪੂਰੇ ਸਾਖ ਦੇ ਨਹੀਂ ਘਟ ਸਕਦੇ ਨੇ ਸ਼ੂਕਰ ਦੀ ਇਹ ਪੜਦਾ ਤਾਂ ਉਹ ਸ਼ੂਕਰ ਸੁਕਰ ਪਰ ਦਵਾ ਨਹੀਂ ਕਰਦਾ ਚੁੱਪ ਤਾਂ ਨਹੀਂ ਪਟਦੇ ਜੂਵੇਂ ਜਿਹੜੇ ਨੇ ਸੰਤ ਬੈਦ ਜੀ ਕਰਨੀ ਗੰਦਗੀ ਫੇਰਉਂਦੇ ਚੁੱਪ ਕਰਕੇ ਇੱਕ ਜਿਹੜਾ ਹਿੱਕ ਠਾਪੜ ਕਹੇਗਾ ਵੀ ਇਹ ਫਲਾਉਂਦਾ ਗੰਦਗੀ ਤੇ ਕਪੜਾ ਚੋਰੀ ਤੇ ਗੁਪਤੀ ਜਿਗਾ ਫਲਾਉਂਦਾ ਗੰਦਗੀ ਕਿਛਦੇਮ ਕਿਛਦੇਮ ਉਹ ਗੁਪਤੀ ਵਾਲੇ ਨੇ ਉਹ ਸਤਿ ਦੀ ਹਰ ਉਹ ਉਤਪ੍ਰੇਤ ਚੂਕਰ ਬਣਵਾਜ ਚਲਾ ਕੇ ਸੰਦੇ ਆਜੀ ਚਲਾਕੀ ਕਰਦੇ ਨੇ ਉਤਪ੍ਰੇਧ ਹੈਂ ਸਰੀਰ ਤੋਂ ਉੱਤੇ ਉੱਠਦੇ ਹੀ ਜਿਹੜਾ ਸਰੀਰ ਪਰ ਨਹੀਂ ਉੱਤੇ ਉੱਠਦਾ ਉਹ ਉਤਪ੍ਰੇਧ ਹੈ ਸਿਰ ਤੋਂ ਉੱਤੇ ਹੀ ਉੱਠਦਾ ਖਾਲੀ ਹੁੰਦਾ ਭਾਰ ਨਹੀਂ ਕਰਦਾਈ ਜੀ। ਬਹੁਤ ਪ੍ਰੇਤਿਓ ਕੀ ਹੈ। ਮਾਇਆ ਕੋ ਪ੍ਰੇਤ ਹੈ। ਬਾਜੀ ਸਭ ਤੇ ਨੇਰੇ ਸਭ ਬੂਡੇ ਦੂਰ। ਨਿਰਗਾਂਕ ਆਪਾ ਲਿਪੜਿਆ ਪਰਸੂ। ਜੀ ਨਿਰਗਾਜ ਕਿਹਦੇ ਨਿਰਗਾਜ। ਬੇਡਾ ਬੁੱਧੀ ਵਾਲੇ ਨੇ, ਚਲਾ ਬੁੱਧੀ ਵਾਲੇ ਨੇ। ਉਸਾਤ ਸਾਮ ਪਾੜੇ ਨੇ ਸੱਜਾ ਤੋ ਨਾ ਇਕ ਨਾ ਚੱਲੇ ਨਾਲ ਗਾਹਾਂ ਨੂੰ ਗੁਰੂ ਜੀ ਦੇ ਸਾਹਮਣੇ ਨਹੀਂ ਚੱਲਦੀ ਹੈ ਉਹ ਵੇਖਦੇ ਸਾਹਮਣੇ ਨਹੀਂ ਜਾਂਦੀ ਤੋ ਕੋਈ ਕੰਤਾ ਰੁਕਾਇ ਨਾ ਦੂਰ ਨਾਨਕ ਆਪ ਅਲਿਪਤ ਪ੍ਰਭੂ ਸਭੂ ਤੋਂ ਨੇੜੇ ਸਭੂ ਤੋਂ ਦੂਰ ਸਭੂ ਤੋਂ ਨੇੜੇ ਹੁੰਦਾ ਹੋਇਆ ਵੀ ਸਭੂ ਤੋਂ ਦੂਰ ਬਣਾ ਬਿਠਾ ਤੇ ਬਣਾਇਆ ਬਿਠਾ ਦੂਤਿਆ ਕੋਲ ਕੋਲਦੀ ਹੈ ਸਭ ਤੋਂ ਬਿਹਰੇ ਹੋਸਤ ਨਾਲ ਆਪਰੇ ਹਬਰੂ ਆਪ ਲਿਪਤ ਆਪ ਲਿਪਤ ਰਹਾ ਆਪ ਲਿਪਤਾ ਹਵਾ ਤਾਂ ਪਿੱਛੇ ਹੀ ਹੈ ਲਿਪਤਾ ਦਵਾਜਲ ਮਾਜਲ ਪਾਣੀ ਪਿੱਛੇ ਪਿੱਛੇ ਆ ਰਹਾ ਪਰਕੂ ਅਰ ਪੜ ਕੇ ਪੂਰਾ ਕਰ ਰਿਆ ਗਿਆਨ ਜਾਂ ਨਾ ਫਲ ਬਦਾ ਦੇ ਜਾਂ ਤੇਰੇ ਕੋਲ ਨੇ ਮਾਇਆ ਚ ਲਿਪਟ ਰਹਿ ਕੇ ਜਾਂ ਨਾ ਫਲ ਬਦਾ ਬੈਠਾ ਕੰਮ ਤਾਂ ਉਹੀ ਕਰ ਰਿਹਾ ਉਹੀ ਕਰ ਰਿਹਾ ਉਹੀ ਗਿਆਨ ਆਪਣਾ ਬਹੁਤ ਹੈ ਉਹ ਕੱਲਾ ਹੀ ਹੈ ਉਹਦਾ ਧਿਆਨ ਉਹ ਆਪ ਹੈ ਉਹਨਾਂ ਗਿਆਨਿੰਦਰਾ ਨਾਲ ਗੱਲ ਕੀਤੀ ਉਹ ਗਿਆਨਿੰਦਰੇ ਉਹੀ ਕਰ ਰਿਹਾ ਆਪ ਹੈ ਉਹ ਮੁਖਾਤ ਹੋਵੇ ਬਸ ਜਿੱਦਾ ਜਿਆਦਾ ਅੰਸਰ ਧਿਆਨ ਹੁੰਦਾ ਹੋ ਅੰਸਰ ਧਿਆਨ ਹੁੰਦਾ ਬਾਹ ਜਿਹੜਾ ਹਵਾ ਜੀ ਜਦੋਂ ਜਿਆ ਅੰਸਰ ਧਿਆਨ ਤਾਂ ਨਾ ਪਾਡੀ ਚੀਂਦਾ ਆਪਣੇ ਬਸ ਕੋਈ ਤਾਂ ਨਹੀਂ ਹੋਇਆ ਸਤਿ ਆਂਦੇ ਲੱਗਦਾ ਆਪਾਂ ਨੂੰ ਰਹਿੰਦੇ ਤਾਂ ਤਕਰੀਬਨ ਆਪਾਂ ਜਿਆਦਾ ਸਰੀਰ ਤੋਂ ਪਰੇ ਹੀ ਆ ਹਾਂ 24 ਘੰਟੇ ਚ ਕਿੰਨਾ ਕਿਹੜਾ ਆਪਣਾ ਸਰੀਰ ਦੇ ਕੇਂਦਰ ਹੁੰਦਾ ਬਹੁਤ ਘੱਟ ਚ ਹੈ ਨਹੀਂ ਅਸਲ ਜਿਹੜੇ ਕੰਮ ਚ ਇਹ ਨਿੱਕੇ ਜਿਹੇ ਤੇ ਪੌਣ ਪਾਣੀ ਕਿਹਦੇ ਸਰੀਰਾ ਜਿੱਤੇ ਪੌਣ ਪਾਣੀ ਆਉਂਦੇ ਇਹ ਸਰੀਰ ਹੈ ਜਰ ਸਰੀਰ ਵੀ ਨਾ ਹੱਥ ਪੈਰ ਕੰਮ ਕਰਦਾ ਹੋਇਆ ਮੁਰਗੇ ਵੀ ਪਿੱਛੇ ਪੱਛੇ ਨਾਲ ਕਰਦੇ ਉਹ ਪੌਣ ਪਾਣੀ